ਦੇ ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁੱਲ ਗਰਬਤੈ ਸੰਕੁਤ ਦੇਖਿਆ ਛਲੰਗ ਛਿਦਰੰ ਨਾਨਕ ਬਿਨ ਹਰ ਸੰਗੀ ਨਾ ਚਾਲਤੇ ਜਿਹੜੇ ਰਾਜ ਹੈ ਉਹ ਵੀ ਕਪਟ ਹੈ ਉਹ ਤੈਨੂੰ ਛਾਲਾ ਨਾਲ ਰਾਜ ਮਿਲ ਗਿਆ ਦੇਖੀ ਹਰਕ ਮਿਲ ਜਾਣਾ ਤੋ ਰਾਜਾ ਬਣ ਗਿਆ ਨਰਕ ਵੀ ਹੈ ਰਾਜੋ ਨਰਕ ਵੀ ਹੈ ਬਚ ਕੇ ਰਹੀ ਕਪਾ ਕਰਨਾ ਹੋਇਆ ਰੂਪ ਜੇ ਤੈਨੂੰ ਚੰਗਾ ਮਿਲ ਗਿਆ ਇਹ ਵੀ ਕਪਾ ਇਹਨੇ ਆਪਣੇ ਨਾਲ ਜੋੜ ਲੈਣਾ ਤੇਰੇ ਮੂਰ ਨਾਲ ਜੋੜਨ ਨੂੰ ਵੀ ਕਪਾ ਹੋਇਆ ਤੇਰੇ ਨਾਲ ਤੇਰੇ ਤੇਰਾ ਆਪਣੇ ਮੂਰ ਤੇਰੇ ਮੂਰ ਨਾਲ ਜਿਹੋ ਨਾਲ ਗੁਰਬਤਾ ਇਹ ਸਾਰੀਆਂ ਗੱਲਾਂ ਗੁਰਬੰਧਕਾਰ ਕਹਿਵਾ ਕਰਨ ਵਾਲੀਆਂ ਨੇ ਸੰਤਾਰ ਨੇ ਨਾਮ ਦਾ ਵਿਰੋਧ ਕਰਨਾ ਇਹ ਤਾਂ ਸਾਡਾ ਟੋਟਰ ਬਾਹਰੇ ਬਣ ਜਾਣਾ ਇਹਦਾ ਦਾਂਦਾ ਵੀ ਅਹੰਕਾਰ ਬਣ ਜਾਣਾ ਰੂਪ ਦਾ ਵੀ ਅਹੰਕਾਰ ਬਣ ਜਾਣਾ ਤੇ ਰਾਜ ਦਾ ਵੀ ਅਹੰਕਾਰ ਬਣ ਜਾਣਾ ਸਾਰ ਵਜਣਾ ਇਹਦੇ ਨਾਲ ਨਹੀਂ ਨਾ ਸਾਰੀ ਇਹ ਇਹ ਹੀ ਝੜਾ ਹੈ ਟੋਟਲ ਟੋਟਲਾ ਪਕਦੇ ਨੇ ਹਾਂਜੀ ਹਾਂ ਤੇ ਸਭ ਗਰਭ ਕਹ ਪੈਦਾ ਕਰਨ ਵਾਲਾ ਹੈ ਸਭ ਕੁਝ ਅੱਛਾ ਜੀ ਮੈਂ ਸੋਚਿਆ ਕਿ ਕੁੱਲ ਜਿਹੜਾ ਹੁੰਦਾ ਹੈ ਵੀ ਜਾਤ ਔਰ ਕੁੱਲ ਉਹਦੀ ਦੀ ਨਹੀਂ ਗੱਲ। ਅੱਛਾ ਜੀ। ਰਾਜ ਪਲੱਸ ਰੂਪ ਪਲੱਸ ਧਨ। ਤਾਂ ਇਹ ਤੋਰਦਿਲ ਪੁੱਛ ਨਹੀਂ ਕੀਤਾ। ਜਿਹਨਾਂ ਨੂੰ ਜੋੜ ਲੀਏ ਤੇ ਨਾਲੋਂ ਹਫਤੇ ਹੈ ਤੇ ਨਾਲ ਹੋਇਆ। ਤੇ ਹੋ ਗਿਆ ਤੇ ਨਾਲ ਅੱਗੇ ਆ ਗਿਆ ਨਾ ਅਗਲੀ ਪੰਕਤੀ ਤੇ। ਠੀਕ ਹੈ ਜੀ। ਸੱਚਤੀ ਵਿਖਿਆ ਜਿੰਨੀ ਮਾਇਆ ਕੱਠੀ ਕੀਤੀ ਹੈ ਤਾਂ। ਛੜੰ ਇਹ ਜੜਾਇਆ ਤੇ ਨਾ ਇਹ ਤੇਰਾ ਖਰਾ ਨਾਸ ਕਰ ਦੇਣਾ ਗਿਆਨ ਦਾ ਜਿੱਦੜ ਕਰ ਦੇਣਾ ਛੇ ਕਰ ਦੇਣਾ ਤੇਰੇ ਗਿਆਨ ਦੇ ਵਿੱਚ ਨੇ ਪਰ ਪਹਿਲਾਂ ਛਿੱਟੇ ਮਾਰ ਦੇ ਕਾਲਾ ਕਰ ਦੇਣਾ ਤੇਰੇ ਮਾਨੋ ਨਾਲਕ ਬਿਨ ਹਰ ਸੰਗ ਨਾ ਚੱਲਤੇ ਹਰਤੇ ਬਿਨ ਕਿਸੇ ਨੇ ਸਾਥ ਨਹੀਂ ਦੇਣਾ ਇੱਥੇ ਗਈ ਜਾਨ ਕਿਉਂਕਿ ਬਿਨ ਕਿਸੇ ਨੇ ਸਾਥ ਨਹੀਂ ਜਾਣਾ ਇਹਦੇ ਦੇਣਾ ਥਾਣਾ ਕਿਹਨੇ ਸਾਥ ਨਹੀਂ ਜਾਣਾ ਇਹਦਾ ਕਰਕੇ ਉਹਨੂੰ ਘੁੱਲਿਆ ਹੋਣਾ ਜਿੱਤੇ ਤੇਰਾ ਸਾਥ ਦੇਣਾ ਉਹਨੂੰ ਕੋਲ ਰਿਹਾ ਹਾਂ ਸਾਹ ਦੇਣ ਵਾਲੇ ਨੂੰ ਇਹਨਾਂ ਨੂੰ ਜਫਾ ਵਾਲਿਆ ਹੈ ਤਾਂ ਇਹਨਾਂ ਦਾ ਪ੍ਰੇਮਾ ਹੈ ਇਹਨਾਂ ਦੇ ਸਾਥ ਦਾ ਜਿਹਨਾਂ ਸਾਥ ਉਹਨੂੰ ਸਾਥ ਰੱਖਿਆ ਹੋਇਆ ਹੈ ਜੀ ਤੇ ਖੰਡੜੋ ਕੀ ਭੁੱਲ ਤੁਮਾਂ ਬੇਸਮ ਸੋਹਣਾ ਅੱਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾਲ ਜੁਲਈ ਮਾਇਆ ਦੇਖੋ ਜਿਆਦਾ ਸੀ ਕਹਿੰਦੇ ਤੁਮੈਨੂੰ ਵੇਖ ਕੋੜ ਤੁਮਾ ਹੁੰਦਾ ਨਾ ਉਹ ਕਹਿੰਦੇ ਥੋੜਾ ਬਲਾ ਲੱਗਦਾ ਹੈ ਨੂੰ ਉਹ ਵਿੱਚੋਂ ਨਹੀਂ ਨਾ ਪਤਾ ਜੋ ਵਿੱਚੋਂ ਕੱਟ ਕੇ ਖਾਉ ਜੀ ਉਹ ਨਾ ਉਹ ਫਿਰ ਪਤਾ ਲੱਗੂਗੀ ਦੇਖਣ ਉੱਤੋਂ ਉੱਤੋਂ ਪੁੱਛਿਆ ਬੜਾ ਸੋਹਣਾ ਇਹ ਨਾ ਉਹ ਅੱਡ ਨਾਲ ਲੰਘ ਰੋ ਮੁੱਲ ਕੁੱਤੀ ਖੋਦੀ ਮਾਇਆ ਇਹ ਜਿਹੜੀ ਮਾਇਆ ਇਹਦਾ ਵੀ ਕੋਈ ਕੁੱਤੀ ਖੋਦੀ ਮੁੱਲ ਨਹੀਂ ਹੈ ਦਰਗਾਹ ਤੋਂ ਫੇਰ ਕਿਹੜਾ ਜਾਣ ਤੇਰੇ ਉਸ ਵੇਲੇ ਕੁੱਤੀ ਖੋਦੀ ਦੇ ਕੰਮ ਆਉਣੀ ਹੈ ਮਾਇਆ ਜਿਵੇਂ ਉਹ ਤੁਮਾ ਭਗਾ ਕੇ ਮਾਰੀਦਾ ਹੈ ਨਾ ਜਦੋਂ ਉਹਦਾ ਕੇਸ ਲਈਦਾ ਹੈ ਜਾਂ ਮਾਇਆ ਨਾਲ ਉਹ ਵਾੜਨੇ ਤੇ ਲੱਗਣਾ ਨਾ ਜਾਂ ਜਦੋਂ ਮਾਇਆ ਨੇ ਮੇਰੇ ਨਾਲ ਗੱਲ ਕੀਤਾ ਉਦੋਂ ਤੁਮੇ ਨੂੰ ਦੱਸ ਦੇਗਾ ਫਿਰ ਕਹੇਗਾ ਉਹ ਗਲਤੀ ਫਿਰ ਇਹਨੂੰ ਭਗਾ ਕੇ ਛੱਡੇਗਾ ਪਰ ਜਿਵੇਂ ਤੁਮੇ ਨੇ ਕੇਸ ਲੈ ਕੇ ਭਗਾ ਕੇ ਪਰੇ ਮਾਰਦਾ ਨਾ ਤੇ ਹੁਣੇ ਮਾਇਆ ਚੰਗੀ ਲੱਗਦੀ ਹੈ ਜਿੰਨਾ ਕਿ ਤੇਰਾ ਸਰੀਰ ਮਾਇਆ ਦਾ ਮਾਇਆ ਦਾ ਸਰੀਰ ਤੇ ਨਾਰਿਆ ਤੇ ਕੋਈ ਦੇ ਕੰਮ ਨਹੀਂ ਸਮਾਇਆ ਕਿਸੇ ਕੰਮ ਨਹੀਂ ਹੈ ਤੇਰਾ ਜੋ ਤੇ ਕੰਮ ਨਹੀਂ ਹੋਇਆ ਹੈ ਕੀ ਇਸ ਬੇਖਮਾਗੀਏ ਕੀ ਤਰਫੋਂ ਰਹਿਣ ਉਦੋਂ ਦੁੱਸਲਾ ਨੋ ਜਾ ਉਦੋਂ ਸਮਝ ਆਣੀ ਆ ਵੀ ਮੈਂ ਦੱਤੀ ਕੀਤੀ ਠੀਕ ਕਰਕੇ ਹਾਂਜੀ ਕੌੜੀ ਚਲਦਿਆਂ ਨਾਲ ਜਿਸ ਤੇ ਵੰਜੀਏ ਚਲਦਿਆਂ ਨਾਲ ਨਾ ਚੱਲੇ ਜਿਹੜੀ ਚਲਦਿਆਂ ਦੇ ਨਾਲ ਨਹੀਂ ਜਾਂਦੀ ਜਦੋਂ ਥਲੀ ਛੱਡ ਕੇ ਜਾਣਾ ਉਹ ਨਾਲੇ ਜਾਣਾ ਉਹਦੇ ਇਕੱਠਾ ਕਰਨ ਦਾ ਕੀ ਫਾਇਦਾ ਉਹਨੂੰ ਜੋੜ ਕੇ ਸਮਰਨਾ ਕੀ ਫਾਇਦਾ ਹੈ ਕਿਸ ਕਾ ਕੋ ਕਿਆ ਯਤਨ ਉਹ ਸੀਦਾ ਜਤਨੇ ਕਿਉਂ ਕਰਾ ਕਰੀਏ ਜਿਸ ਤੇ ਵੰਡੀ ਹੈ ਜਿੱਦੋ ਵੰਡੀ ਰਹਿ ਜਾਣਾ ਜਿਹੜੀ ਚੀਜ਼ ਚੱਲਣਾ ਚਾਹੀਦਾ ਇਹ ਮੰਨ ਕੇ ਇਹਦੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਤਾਂ ਤਮੜਾ ਤਿੱਖਾ ਜੋ ਖੱਤੇ ਖਾਏ ਦੇ ਵੇਦ ਲਾਇ ਰਜਾਇਦਾ ਹਾਂ ਹਾਂ ਹਰ ਬਿਸਰੀਏ ਕਿਉਂ ਤ੍ਰਿਪਤਾਵੇ ਨਾ ਮੰਨ ਰੰਜੀ ਹੈ ਪ੍ਰਭੂ ਛੋੜ ਅਨ ਤ੍ਰਿਪਤ ਹੋ ਆ ਮਨ ਇਹ ਹਰ ਬਥਰੇ ਮਨ ਨਹੀਂ ਤ੍ਰਿਪਤ ਹੋ ਸਕਦਾ ਇਹਦੇ ਚ ਰੰਝ ਕਰਨ ਵਾਲੀ ਕੋਈ ਗੱਲ ਨਹੀਂ ਹੈ ਜੇ ਕੋਈ ਗੁੱਸਾ ਕਰਦਾ ਤਾਂ ਮੂਰਖਤਾਈ ਹੈ ਜੇ ਕੋਈ ਕਰੇ ਚਾਹੇ ਮਾੜਾ ਫੇਲ ਨਾ ਮਨ ਤ੍ਰਿਪਤ ਹੋ ਤਾਂ ਬਿਲਕੁਲ ਗਲਤ ਹੈ ਜੇ ਕੋਈ ਕਰੇ ਸੁਪਤੀ ਮਨ ਤ੍ਰਿਪਤ ਹੋ ਬਿਲਕੁਲ ਗਲਤ ਹੈ ਇਹ ਕੋਈ ਸਹੇ ਵਾਗ ਰੂਆ ਨੂੰ ਕਹਨਾ ਰਾਮ ਰਾਮ ਸਰਵਰ ਮੰਤਰੀ ਕੋਈ ਬਿਲਕੁਲ ਕਰਤਾ ਨਹੀਂ ਹੋਇਆ ਕਿਸੇ ਦਾ ਨਾ ਹੈ ਜਿਹਨੂੰ ਉਹਨੂੰ ਧੋਖਾ ਦੀ ਬਿਆਪਦਾ ਸਭਨੇ ਧੋਖਾ ਖਾਤਾ ਹੋਇਆ ਨਹੀਂ ਤਾਂ ਹੋਰ ਪਾਸੇ ਲੱਗੇ ਨੇ ਸਮਝੋ ਨਰਕੇ ਨਰਕ ਸਮਝ ਲਓ ਨਰਕੇ ਸਮਝ ਲਓ ਕੋਈ ਲੱਗਿਆ ਹੋਇਆ ਅੱਤ ਕੋਈ ਸਾਨੂੰ ਦੁੱਖ ਜਰੈ ਜਵੇ ਭਾਈ ਪ੍ਰਭੂ ਥੋੜ ਅਨ ਲੱਗ ਗਿਆ ਨਰਕ ਸਮਝੀ ਹੈ ਪ੍ਰਭੂ ਆਪ ਕਹਾਂ ਕਰਕੇ ਹੋ ਜਾਂ ਨਨੇ ਚ ਸਮਾ ਜਾਣਾ ਕੇ ਕਹਿ ਲੋ ਚਲੋ ਬਾਣੇ ਨੂੰ ਛੱਡ ਕੇ ਕਹਿ ਲੋ ਜੇ ਗੁਰ ਕੇ ਨੂੰ ਛੱਡ ਕੇ ਹੋਰ ਪਾਸੇ ਲੱਗਿਆ ਹੋਇਆ ਉਹ ਤਾਂ ਸਮਝੋ ਨਰਕ ਦੇ ਵਿੱਚ ਹੀ ਹੈ ਫਿਰ ਨਰਕ ਵੱਲ ਜਾ ਰਿਹਾ ਨਰਕ ਤੋਂ ਬਚਾ ਪਾਣਾ ਮੰਨ ਕੇ ਹੀ ਹੈ ਬਾਣਾ ਬੰਨੇ ਤੋਂ ਬਿਨਾਂ ਨਰਕ ਤੋਂ ਬਚਾ ਨਹੀਂ ਹੈ ਕਹਿਣ ਦਾ ਮਤਲਬ ਇਹ ਉਹ ਹੁਕਮ ਹੀ ਬੰਦਾ ਹੈ ਜਿਹੜਾ ਸੱਚਾ ਜਿਹੜਾ ਸਾਡਾ ਮੂਲ ਹੁਕਮ ਹੀ ਬੰਦਾ ਹੈ ਉਹਦੇ ਨਾਲ ਜੁੜ ਕੇ ਵੀ ਹੁਕਮ ਦੇ ਵਿੱਚ ਰਹਿਣ ਦੀ ਉਹ ਗੱਲ ਹੈ ਅਸੀਂ ਆਪਣਾ ਜਿਹੜਾ ਭੌਤ ਹੈ ਜਿਹੜਾ ਨਾਸ ਕਰ ਦਈਏ ਹੋਰ ਕੋਈ ਕਰੇ ਕੋਈ ਨਾ ਕਰੇ ਸਾਡੇ ਤੇ ਕਿਰਪਾ ਕਰ ਦਿਆ ਕਰ ਹੁਕਮ ਦੇ ਵਿੱਚ ਹੀ ਭੌਤ ਦੀ ਨਾਸ ਹੋਣਾ ਸਰਮੋ ਮੇਰਾ ਭਰਮ ਗਿਆ ਬਹੁਤ ਬੜਾ ਉਹ ਕੋਈ ਜਿਹੜਾ ਇੱਥੇ ਪਰ ਦੂਰ ਹੋਣਾ ਉਹ ਜਿਹੜਾ ਇੱਥੇ ਪੋ ਜਿਹੜਾ ਹੈ ਘਰ ਹੈ ਇਹਨਾਂ ਨਾਲ ਬਹੁਤ ਠੀਕ ਹੈ ਜੀ ਇੱਥੇ ਦਸਵੀਂ ਪੌੜੀ ਸਮਾਪਤੀ ਹੈ ਜੀ ਜੀ